ਛੇਵੀਂ ਪੌੜੀ ਸ਼ੁਰੂ ਹੈ ਜੀ ਪੰਜਵੀਂ ਪੰਜ ਭੂਤ ਬੇਤਾਲਾ ਆਪ ਗੋਚਰਪੁਰਖ ਮਿਰਾਲਾ ਹਾਂ ਪੰਜਵਾਂ ਨੰਬਰ ਤੇ ਆ ਗਿਆ ਛੇਵੀਂ ਪੌੜੀ ਹੈ ਵੈਸੇ ਉਹ ਤੋਂ ਪਹਿਲੀ ਪੌੜੀ ਤਾਂ ਹੈ ਨਾ ਮਾਇਆ ਤੋਂ ਪਰੇ ਦੀ ਇਹ ਪੌੜੀਆਂ ਬਾਕੀ ਮਾਇਆ ਤੋਂ ਦੂਈ ਨੰਬਰ ਤੋਂ ਮਾਇਆ ਸ਼ੁਰੂ ਹੁੰਦੀ ਹੈ ਨਾ 1 ਨੰਬਰ ਤੇ ਤਾਂ ਆਪ ਹੀ ਹੈ ਜੋਤ ਵੰਤਾਂ ਦੋਨੇ ਨੂਰੇ ਉਪਾਇ ਨੂਰ ਹੈ ਨੂਰ ਦੀ ਤਾਂ ਗੱਲ ਨਹੀਂ ਗੱਲ ਤਾਂ ਆ ਰਚਨਾ ਨਾਲ ਨੂਰ ਦੀ ਜਦੋਂ ਸ਼ੁਰੂ ਹੁੰਦੀ ਹੈ ਮਾਇਆ ਕੁਦਰਤ ਸਾਜੀ ਕੁਦਰਤ ਸਾਜੀ ਹੈ ਦਾ ਦਰਸ਼ਨ ਠੀਕ ਹੈ ਜੀ ਪੰਜਵੀਂ ਪੰਜ ਭੂਤ ਬੇਤਾਲ ਜੇ ਤਾਂ ਕਹਿੰਦੇ ਪੰਜ ਭੂਤ ਸਰੀਰ ਨਾਲ ਜੁੜਿਆ ਹੋਇਆ ਮਾਇਆ ਨਾਲ ਜੁੜਿਆ ਹੋਇਆ ਵੇ ਤਾਂ ਸਮਝੋ ਬੇਤਾਲਾ ਫੇਰ ਨਹੀਂ ਇਹਦੀ ਤਾਲ ਲੜਨੀ ਫੇ ਆਪਣੇ ਪਾਣੀ ਚੱਲੂਗਾ ਫੇ ਨਹੀਂ ਹੁਕਮ ਦੇ ਵਿੱਚ ਚੱਲਦਾ ਜਿਹੜੇ ਮਾਇਆਧਾਰੀ ਨੇ ਉਹ ਤਾਂ ਅੰਨੇ ਬੋਲੇ ਨੇ ਹੁਕਮ ਨਹੀਂ ਸੁਣਦਾ ਉਹਨਾਂ ਨੂੰ ਰਾ ਕੋਦਰਤ ਦੀਂਦੀ ਚੱਲ ਸਕਦੇ ਹੋ ਗੁਰਗੇ ਪਾਣੀ ਤਾਂ ਚੱਲਦੇ ਨੇ ਭਗਤ ਸੰਸਾਰ ਚੱਲਦਾ ਆਪਣੇ ਪਾਣੀ ਇਸ ਕਰਕੇ ਦੋਹਾਂ ਦਾ ਮੇਲ ਨਹੀਂ ਹੁੰਦਾ ਆਪ ਅਗੋਚਰਪੁਰਖ ਨਰੋਲੋ ਜਦ ਕਿ ਆਪ ਇਹ ਜਿਹੜਾ ਹੈ ਵੋਝੇਰ ਫੁਰਖਾ ਨਾ ਰਹਾ ਮਾਇਆ ਤੋਂ ਅਡਾ ਜੇ ਆਤਮਾ ਲੈ ਤੇ ਜਿਉਂਦਾ ਆਪਣੇ ਮੂਲ ਕੇ ਜਿਉਂਦਾ ਫਿਰ ਨਿਰਾਲਾ ਫਿਰ ਮਾਇਆ ਚ ਰਹਿੰਦਾ ਆਇਆ ਵੀ ਮਾਇਆ ਤੇ ਮਾਇਆ ਤੋਂ ਪੰਨਾ ਗੁਰਮੁਖੀਦਰ ਮਾਇਆ ਵਿੱਚ ਉਦਾਸੀ ਹੈ ਨਿਰਾਲਾ ਕੌਣ ਹੁੰਦਾ ਜਿਹੜਾ ਮਾਇਆ ਵਿੱਚ ਉਦਾਸੀ ਹੈ ਉਹ ਨਿਰਾਲਾ ਮਾਇਆ ਤੋਂ ਵੱਖਰਾ ਹੀ ਹੈ ਤਾਲੇ ਕਿਹਾ ਜਦ ਖਾਲਸਾ ਰਹੇ ਨਿਆਰਾ ਨਿਆਰਾ ਜਿਆਦਾ ਜਿਆ ਰਹੋ ਮਾਇਆ ਤਾਰੀ ਨਹੀਂ ਹੈ ਮਾਇਆ ਨੇ ਮੂੰਹ ਤੋਂ ਉੱਪਰ ਉੱਠ ਗਿਆ ਨਿਆਰਾ ਖਾਲਸਾ ਹਾਂਜੀ ਹੈ ਉਹ ਜਿਹੜੇ ਸਾਰੇ ਉਹ ਬਹੁਤੇ ਨਹੀਂ ਵੇਸੇ ਇੱਕ ਦਾ ਮਤਲਬ ਜੇ ਤਾਂ ਇੱਕ ਦਾ ਹੁੰਦਾ ਔਂਕੜ ਤਾਂ ਤਾਂ ਇਹਦਾ ਮਤਲਬ ਇੱਕੋ ਹੁੰਦਾ ਕਿ ਇੱਕ ਨੂੰ ਸਿਆਰੀ ਹੈ ਤਾਂ ਬਹੁਵਚਨ ਹੈ ਇੱਕ ਤਾਂ ਇਹ ਨੇ ਪਿੰਦ ਪਿੰਦ ਮਤਾਂ ਦੇ ਜਿਹੜੇ ਮਨਮਤੀਏ ਨੇ ਪਰਮ ਕਰਕੇ ਭੁੱਖੇ ਨੇ ਮਾਇਆ ਦੀ ਭੁੱਖਾ ਨੂੰ ਉਹਨੂੰ ਪਰਮ ਕਰਕੇ ਇਹ ਲੋੜ ਨੂੰ ਭੁੱਖ ਬਣਾ ਲਿਆ ਉਹਨਾਂ ਨੇ ਮੋਹ ਪਿਆਸੇ ਉਹ ਮਾਇਆ ਦੇ ਮੋਹ ਦੀ ਪਿਆਸ ਜਿਹੜੀ ਹੈ ਉਹ ਕੁਝ ਵੀ ਨਹੀਂ ਉਹਦੀ ਮਾਇਆ ਮੋਹ ਦੇ ਪਿਆਸੇ ਨੇ ਉਹ ਪਰਮ ਕਰਕੇ ਇਹ ਤਾਂ ਹੈਗੇ ਨੇ ਜਿਹੜੇ ਪੰਚਕੂਤ ਬਤਾਲੇ ਦੇ ਜਿਹੜੇ ਦੂਜੇ ਨੇ ਇੱਕ ਰਸ ਚੱਖਣ ਕੁਝ ਇਹ ਜੇ ਗੁਰਮੁਖ ਨੇ ਦੇਖੋ ਇੱਥੇ ਰਾਸ ਦਾ ਇੱਕ ਵਚਨ ਸਿੱਖਣ ਵਾਲੀ ਗੱਲ ਇਹ ਹੈ ਵਚਨ ਇੱਥੇ ਜੇ ਰਾਸ ਬਹੁ ਵਚਨ ਹੁੰਦਾ ਤੇ ਮਾਇਆ ਦੇ ਹੋ ਜਾਂਦੇ ਸੀ ਇਹ ਇੱਕ ਇੱਕ ਲਫ਼ਜ਼ੋ ਵਰਤੇ ਆ ਕਿਉਂਕਿ ਇੱਕ ਨਹੀਂ ਨਾ ਆਦਮੀ ਆਦਮੀ ਤਾਂ ਬਹੁਤ ਨੇ ਜਿਹੜੇ ਰਾਸ ਚੱਕਦੇ ਨੇ ਨਾਮ ਦਾ ਆ ਹੀ ਹੈ ਪਰ ਉਹਨਾਂ ਦਾ ਨਾਮ ਰਾਸਾ ਚਾਖ ਸ਼ਬਦ ਤ੍ਰਿਪਤਾਸਤੇ ਜਿਹੜੀ ਗੁਰਬਾਣੀ ਦਾ ਉਪਦੇਸ਼ ਹੈ ਸ਼ਬਦ ਇਹਦਾ ਨਾਮ ਰਾਸ ਚੱਕੇ ਉਹ ਤ੍ਰਿਪਤ ਹੋ ਜਾਂਦੇ ਨੇ ਸੰਤੋਖੀ ਹੋ ਜਾਂਦੇ ਨੇ ਤਨ ਟੋਕੀ ਹੋ ਗਿਆ ਤੇ ਤਸੇ ਹਮਾਇਆ ਦੀ ਭੁੱਖ ਪਿਆਸ ਨਹੀਂ ਤੇ ਇੱਕ ਮਰ ਧੂਰ ਇੱਕ ਦਰ ਦੇਖ ਹਦੂਰ ਇੱਕ ਅਮੀਰਾ ਤੇ ਇੱਕ ਜਿਹੜੀ ਆ ਗਈ ਕੋਈ ਵੀ ਰੰਗ ਹੈ ਚਾਹ ਮੱਤਦਾ ਕੇ ਸਦਾ ਅੱਡ ਰੰਗ ਨੇ ਜਿਹੜੀ ਸੁਣ ਲਈ ਉਹਦਾ ਹੀ ਰੰਗ ਚੜ ਗਿਆ ਉਹਨਾਂ ਨੂੰ ਕੋਈ ਇਸਲਾਮ ਦੇ ਨਾਲ ਜੁੜੇ ਹੋਏ ਨੇ ਕੋਈ ਜੋਗੀਆਂ ਨਾਲ ਜੁੜੇ ਹੋਏ ਨੇ ਇਸਲਾਮ ਦੇ ਵੀ ਦੇ ਵੀ ਹੈਗੇ ਨੇ ਅੱਡ-ਅੱਡ ਉਹ ਜਿਹੜੀ ਵੀ ਮਤ ਸੁਣ ਲਈ ਉਹਦਾ ਹੀ ਰੰਗ ਚੜ ਜਾਂਦਾ ਜਿਹੜੀ ਵੀ ਮਾਤਰਾ ਦਾ ਰੰਗ ਹੈ ਉਹਦੇ ਨਾਲ ਹੀ ਰੰਗ ਅਟੈਚਮੈਂਟ ਕਰਕੇ ਉਹਦਾ ਹੀ ਰੰਗ ਚੜਾ ਲੈਂਦੇ ਨੇ ਕੁਝ ਆਏ ਜੇ ਲੋਕ ਨੇ ਉਹ ਰੰਗ ਰੰਗਤਾ ਹੈ ਨਹੀਂ ਉਹਨਾਂ ਦਾ ਉਹ ਕੰਨ ਨੇ ਬਸ ਅਖੀਰ ਨੂੰ ਤਾਂ ਮਿੱਟੀ ਹੋ ਜਾਣ ਉਹ ਸਵਾਹ ਵੜ ਲੈਂਦੇ ਨੇ ਜੋਗੀ ਉਹ ਜਿਹੜੇ ਨਾ ਜੋਗੀ ਉਹਨਾਂ ਦਾ ਸੰਸਾਰੀ ਰੰਗ ਕੋਈ ਨਹੀਂ ਹੈਗਾ ਜਿਹੜਾ ਸੰਸਾਰੀ ਰੱਖਦੇ ਨੇ ਨਾ ਲੋਕਾਂ ਦੇ ਜਿਵੇਂ ਖਟਾ ਰੰਗ ਸੀ ਇਹਨਾਂ ਦਾ ਜਿੰਦੂਆਂ ਦਾ ਉਹ ਕਹਿੰਦੇ ਬਸ ਕੱਲ ਨੂੰ ਜਿਹੜੀ ਢੂੜ ਹੋਣਾ ਸਵਾਹ ਹਣਾ ਪਹਿਲਾਂ ਹੀ ਵੜ ਲਓ ਗਿਆਨ ਵੀ ਹੋਣੀ ਗਿਆਨ ਤਾਂ ਹੈ ਨਹੀਂ ਢੂੜ ਤਾਂ ਹੈ ਅਸਲ ਦੇ ਵਿੱਚ ਪੋਜ਼ਿਟਿਵ ਤਦਾਂ ਧੂੜ ਪੁਨੀ ਤੇਰੇ ਜਨੂ ਜਦ ਕਹਿੰਦਾ ਮੈਂ ਵੀ ਕਰਕੇ ਘਾਲਿਆ ਆਪ ਤੇ ਸਾਇਤ ਸਾਇਰ ਮੰਨੂ ਮੈਂ ਵੀ ਵਰਗਾ ਕੀਤਾ ਗਿਆਨੀ ਕੀਤਾ ਗਿਆਨ ਕਿਹਾਂ ਦੀ ਤਾਂ ਹੀ ਹੁੰਦੀ ਹੈ ਹਾਂਜੀ ਇੱਕ ਦਰ ਘਰ ਸੱਚ ਹੈ ਦੇਖ ਦੂਰ ਇੱਕ ਦਰ ਘਰ ਸੱਚ ਹੈ ਆਪਣੇ ਘਰ ਔਰ ਘਰ ਦੇ ਵਿੱਚ ਸੱਚ ਹੈ ਦੇਖ ਸੱਚੇ ਨੂੰ ਅੰਦਰ ਜਿਨ੍ਹਾਂ ਨੇ ਦੇਖ ਲਿਆ ਅੰਦਰ ਹੀ ਆਪਣੇ ਹਿਰਦੇ 'ਚ ਜੋ ਸੱਚ ਨੂੰ ਦੇਖ ਲਿਆ ਹضور ਹਿਰਦੇ ਵਿੱਚੋਂ ਉਰ ਵਿੱਚੋਂ ਹੀ ਪੂਰੀ ਲੱਭਦਾ ਹضور ਬਣਿਆ ਤਾਂ ਹੱਦ ਪੂਰੀ ਪੂਰੀ ਹਿਰਦਾ ਹੁੰਦਾ ਹੈ ਹੱਦ ਦੇ ਅੰਦਰੋਂ ਹੀ ਦੇਖ ਲਿਆ ਸੱਚ ਨੂੰ ਲੱਭ ਲਿਆ ਅੰਦਰੋਂ ਆਪਣੇ ਉਹ ਉਹ ਗੁਰਮਖੰਦੇ ਤਾਂ ਸਭ ਕਿਸ ਘਰ ਮੈਂ ਬਾਹਰ ਨਹੀਂ ਉਹ ਪ੍ਰਗਟ ਕਰਦੇ ਹਨ ਆਪਣੇ ਮੂਹਰੇ ਜੁੜ ਗਏ ਅੰਦਰੋਂ ਇਹ 6ਵੀਂ ਪੌੜੀ ਦੀ ਸਮਾਪਤੀ ਹੈ। ਹਾਂਜੀ 7ਵੀਂ ਪੌੜੀ ਜੀ। ਝੂਠੇ ਕੋ ਨਾਹੀ ਪਤਨਾਉ। ਕਭੂ ਨਾ ਸੂਚਾ ਕਾਲਾ ਕਾਉਂ। ਅੰਦਰ ਜਿਹੜੇ ਝੂਠੇ ਨੇ ਨਾ ਜਿੰਨੇ ਵੀ ਉਹਨਾਂ ਨੂੰ ਨੋਂ ਦਾ ਨਾਮ ਦਾ ਕਦੇ ਵੀ ਝੂਠਾ ਨਹੀਂ ਹੁੰਦਾ ਲੋਕ ਤੇ ਪੱਤੀ ਨੋਂ ਨਾਮ ਨਾਲ ਗੁਰਮਤਿ ਤੇ ਗਿਆਨ ਤੇ ਕਦੇ ਵੀ ਉਹਨਾਂ ਦਾ ਬੰਦ ਨਹੀਂ ਯਕੀਨ ਕਰਦਾ ਕਿਉਂ ਇਹ ਸੱਚ ਹੈ ਸੱਚ ਨੂੰ ਝੂਠੇ ਕਹਿੰਦੇ ਹੁੰਦੇ ਕਬੂ ਹੋਣਾ ਸੋਚਾ ਕਾਲਾ ਕਹੋ ਜੇਰਾ ਕਾਲਾ ਕਹੂਗਾ ਕਦੇ ਸੋਚਾ ਨਹੀਂ ਹੋ ਸਕਦਾ ਕਦੇ ਚਿੱਟਾ ਨਹੀਂ ਹੋ ਸਕਦਾ ਕਹਿਣਾ ਮਤਲਬ ਉਹਦੀ ਕਾਲ ਖਦੀ ਲੈ ਸਕਦੀ ਆ ਕੰਨਤੀ ਆਪਣੇ ਆਪ ਇੱਥੇ ਪਰ ਅੰਦਰ ਸਾਹਿਬ ਇਹਨਾਂ ਨੇ ਤਾਂ ਕਾਉਂ ਜਿੱਤੇ ਦਿਖਾਤੇ ਉੱਤੇ ਹੁੰਦੇ ਸੀ ਜਿਹੜੀ ਕਹਾਣੀ ਬਣਾਈ ਆ ਇੰਗਲੇ ਵਾਲੀ ਯੋਜਤਾ ਜਾਇ ਹੋ ਕੇ ਨਿਕਲ ਜਾਂਦੇ ਸੀ ਗੁਰਬਾਣੀ ਕੋ ਜੋਰ ਕਹਿੰਦੀ ਐ ਕਿੰਨੇ ਕਾਲਾ ਕੌਣ ਕਹਿੰਦੀ ਕਿੱਤਾ ਹੋ ਸਕਦਾ ਕਾਲਾ ਹੈ ਮਨ ਸਚ ਨਹੀਂ ਹੋ ਸਕਦਾ ਉਹ ਜਿੰਨਾ ਚਿਰ ਮਨ ਦੇ ਵਿੱਚ ਮਲੀਨਤਾ ਹੈ ਪਰਮਾ ਉਹ ਨਾਲ ਚਿਰ ਯਕੀਨ ਨਹੀਂ ਕਰਦਾ ਸਕਤੇ ਸੱਚ ਨੂੰ ਨਹੀਂ ਹੋ ਸਕਦਾ ਸੱਚ ਨੂੰ ਨਹੀਂ ਮੰਨ ਸਕਦਾ ਹੈ ਇੱਥੇ ਗੁਰਬਾਣੀ ਚੇਤਨ ਦੀ ਗੱਲ ਕਰਦੀ ਹੈ ਉਹਨਾਂ ਨੇ ਬਾਹਰੋਂ ਜੜ ਦਿਖਾ ਕੇ ਚਿੱਟਾ ਦਿਖਾਤਾ ਤੇ ਆਪਾਂ ਬਾਹਰ ਲਈ ਵੀ ਕਰੀਏ ਕਿ ਕਿਤੇ ਫਿਰ ਹੋ ਸਕਦੇ ਕਹਾਣੀਆਂ ਬਣਾਉਣ ਵਾਲੇ ਚੋਰ ਸੀ ਸੁਣ ਤੇ ਗੁਰ ਕੱਦ ਕੋਰ ਸੀ ਜੋ ਕਹੀ ਸੁਣੀ ਗਏ ਹਾਂ ਗਏ ਠੀਕ ਹੈ ਪਿੰਜਰੀ ਪੰਖੀ ਬੰਦਿਆ ਕੋਏ ਛੇਰੀ ਭਰਮੈ ਮੁਕਤ ਨਾ ਹੋਏ ਕਹਿੰਦੇ ਜਿਵੇਂ ਪੰਛੀ ਇੱਕ ਪਿੰਜਰੇ ਚ डक ਲੈਂਦੇ ਨੇ ਬੰਨ ਲੈਂਦੇ ਜੇ ਪਿੰਜਰੇ ਪਿੰਜਰਾ ਸੁਰੱਖਾ ਵਾਲਾ ਹੀ ਹੁੰਦਾ ਟੀਲਾ ਨਾ ਬੋੜਿਆ ਹੁੰਦਾ ਆਵਾ ਬਿਉ ਨੇ ਹੁਣੀਆਂ ਸੰਸਾਰ ਵੀ ਉਹਨੂੰ ਦੇਖਣਾ ਪਰ ਉਹ ਇਹ ਜੇ ਸੁਰਾਖ ਹੁੰਦੇ ਨੇ ਪੰਛੀ ਉਹ ਜੀ ਨਿਕਲਦਾ ਸਕਦਾ ਨਹੀਂ ਹੈ ਸੁਰਾਖ ਨਹੀਂ ਹੁੰਦੇ ਨੇ ਬਾਹਰੋਂ ਪਾਸਾ ਨੂੰ ਦੇਖਦਾ ਹੈ ਪਰ ਪਿੰਜਰੇ ਚ ਬਾਹਰ ਨਹੀਂ ਨਿਕਲ ਸਕਦਾ ਉਹ ਜਿਹੜੇ ਸਰਾਖ ਨੇ ਉਹਨਾਂ ਦੇ ਵਿੱਚ ਪਰਬੰਰ ਨਾਲ ਚੁੰਝ ਪਾ ਕੇ ਚੁੰਝ ਦੇ ਨੇ ਉਹਨਾਂ ਪਰਬ ਦਾ ਫਰੀ ਜਾਵੇ ਤਾਂ ਇਸ ਕਰਕੇ ਜਿੰਨੀਆਂ ਵੀ ਮਨਮਤਾਂ ਨੇ ਸਾਰੀਆਂ ਬਦਲ ਬਦਲ ਕੇ ਦੇਖ ਲਵੇ ਕੋਈ ਇਥੇ ਛੜਕਾਰਾ ਨਹੀਂ ਹੋ ਸਕਦਾ ਜਿੰਨਾ ਜਿਹੜੇ ਪਿੰਜਰੇ ਦਾ ਦਰਵਾਜ਼ਾ ਦੀ ਲੱਭਦਾ ਜਿਹੜੇ ਦਰਵਾਜ਼ੇ ਤੋਂ ਬਾੜਿਆ ਉਸੇ ਦਰਵਾਜ਼ੇ ਤੋਂ ਨਿਕਲੂਗਾ ਹੁਕਮ ਨੇ ਬਾੜਿਆ ਹੁਕਮ ਨੇ ਝਾਊਏ ਭਗਵੰਦਰੂਹ ਤ ਆ ਰਹਾ ਜਨਾ ਜਰੋ ਨਹੀਂ ਮਿਲਦਾ ਖੁੱਲਦਾ ਉਹ ਨਾ ਜਣੀ ਨ ਕਰ ਸਕਦਾ ਇਹ ਦੂਜੀਆਂ ਮਤਾਂ ਜਿਹੜੀਆਂ ਨੇ ਮਨ ਮਤਾਂ ਨੇ ਦੱਸਦੀਆਂ ਤਾਂ ਹੈ ਵੀ ਬਾਹਰ ਕੁਝ ਹੈ ਸਚਨ ਹੈ ਮਾਇਆ ਤਾਂ ਬਾਹਰ ਨਹੀਂ ਘੜ ਰਹੀ ਮਾਇਆ ਚ ਫਸਾ ਕੇ ਰੱਖ ਰਹੀਆਂ ਨੇ ਥੋੜਾ ਗਿਆ ਹਾਂ ਤਾਂ ਛੁੱਟੇ ਮੇਲੇ ਭਗਤੀ ਦ੍ਰਿੜਾਏ। ਉਹ ਜਾ ਜਾਂ ਖਤਮ ਨਵਾਇਆ ਜਾਂ ਸੱਚ ਸਾਚ ਸ਼ਬਦ ਛਡਾਉਂਦਾ ਹੈ ਤੇਰਾ ਹੁਕਮ ਛਡਾਉਂਦਾ ਹੈ ਫਿਰ ਜੁੜਦਾ ਹੈ। ਗੁਰਮਤਿ ਮੇਲੇ ਭਗਤੀ ਕਰੇ ਭਗਤੀ ਦ੍ਰਿੜ ਕਰੇ ਗੁਰਮਤਿ ਦੀ ਫਿਰ ਜੁੜਦਾ ਹੈ। ਮਤ ਤੁ ਲਿਓ ਇਹਾਂ ਨੇ ਭਗਤ ਡੁੱਬੇ ਜਾਂਦੇ। ਗੁਰ ਕੀ ਲੈਣੀ ਹੀ ਭਗਤੀ ਕਰਨੀ ਹੈ ਸਾਡੇ ਵਾਸਤੇ। ਇਹੀ ਭਗਤ ਬਿਰੜ ਕਹਾਣੀਆਂ ਸੀ ਗੁਰਮਤ ਕੀ ਕਹਿੰਦੀ ਹੈ ਤਾਂਕਾ ਇਹ ਅਸੀਂ ਸਮਝਣ ਲਈ ਕੀ ਕਹਿੰਦੀ ਹੈ ਸਹੀ ਸਹੀ ਫਿਰ ਉਹਨੂੰ ਮੰਨ ਲੈ ਉੱਤੇ ਤੇ ਚੱਲਣ ਫੇਰ ਪੌੜੀ ਸਮਾਪਤੀ ਹੈ ਕਿ ਹੋਜੀ ਅੱਠਵੀਂ ਸ਼ੁਰੂ ਕਰਦੇ ਹਾਂ ਜੀ ਖਸਤੀ ਖਤ ਦਰਸ਼ਨ ਪ੍ਰਭ ਸਾਜੇ ਹਨहद ਸ਼ਬਦ ਮਿਰਾਲਾ ਵਾਜੂ ਦੇਖ ਲਓ ਇਹ ਤਾਂ ਖੜਦਰਸ਼ਨ ਹੋ ਰਹੇ ਮੰਨੀ ਬੈਠੇ ਨੇ ਸਾਬ ਨੂੰ ਪੁੱਛ ਲੋ ਕੀ ਹੁੰਦੇ ਨੇ ਇਹ ਤਾਂ ਪ੍ਰਭ ਨੇ ਸਾਜੇ ਨੇ ਉਹ ਖੜਦਰਸ਼ਨ ਪ੍ਰਭ ਦੇ ਸਾਜੇ ਨੇ ਉਹ ਤਾਂ ਲਿਖੇ ਹੋਏ ਨੇ ਇਹ ਸਾਜੇ ਹੋਏ ਨੇ ਪ੍ਰਭ ਨੇ ਸਾਜੇ ਜਿਹੜੇ ਖੜਦਰਸ਼ਨ ਸਾਡੇ ਵਾਲੇ ਤਾਂ ਉਹਨਾਂ ਦੇ ਰਿਸ਼ੀਆਂ ਨੇ ਉਹਨੀਆਂ ਦੇ ਲਿਖੇ ਹੋਏ ਨੇ ਉਹ ਗ੍ਰੰਥ ਉਹ ਇੱਥੇ ਉਹਨੂੰ ਬਿਲਕੁਲੇ نیند ਆਈ ਹੁੰਦੀ ਆ ਜਾਨਵਰ ਜੀ ਵੀ ਕੀਤਾ ਉਹਨੇ ਪੱਤ ਸੀ ਤੇ ਆ ਰਿhta ਤੂੰ ਢੀ ਗੱਲ ਲੱਗਿਆ ਤੂੰ ਸੁਟਾ ਪਿਆ ਤੂੰ ਤਾਂ ਸਿੱਖ ਸੀ ਨੇ ਰੌਲਾ ਪਿਆ ਹੈ ਵੀ ਉਹਨੇ ਬਿਵਾਸੀ ਕੀਤੀ ਹੈ ਪੰਡਤ ਨੇ ਇਹ ਸਾਰਾ ਪਲਾਨ ਸੀਗਾ ਇਹਨਾਂ ਦਾ ਜੁਇਦ ਤੱਕ ਉਹਵਾਦੋ ਸਿੱਖਦੀ ਫੇ ਰੌਲਾ ਸੀ ਪਾ ਲਾਂਗੇ ਫੇ ਬੰਦੇ ਬੰਦੇ ਹੁਣ ਠੀਕਾ ਠੀਕ ਹੈ ਜੀ ਹੁਣ ਠੀਕਾ ਠੀਕ ਗੱਲ ਉਹੀ ਹੈ ਇਹ ਖਡਦਾਲਸ਼ਨ ਪਰਬ ਨੇ ਸਾਜੇ ਨੇ ਪਰਬ ਨੇ ਸਾਜਿਆ ਸਰੀਰ ਇਹ ਖਡਦਾਲਸ਼ਨ ਉਹਦੇ ਪੰਜ ਉਹਨਾਂ ਨੇ ਪੰਜ ਬੰਦੇ ਕਿਹਾ ਨੰਦਰੇ ਗੈ ਨੰਦਰੇ ਪੰਜ ਨਹੀਂ 6 ਨੇ 6 ਘਰ 6 ਗੁਰ 6 ਉਪਦੇਸ਼ ਆ ਲੈ ਕੇ ਚੱਲੇ ਸੀ ਅਸੀਂ ਇਹ 6 ਇਹ ਕਹ ਲਿਖੇ ਹੋਏ ਨੇ ਪੰਜੇ ਨੇ ਬਕਰ ਵੀ ਛੇ ਨੇ ਗੁਰਮਤਿ ਇਹਨਾਂ ਤੋਂ ਉਲਟ ਖੜੀ ਆ ਵੀਰ ਕਹਿੰਦਾ ਇੱਕ ਮਰਨ ਤੇ ਦੋਵੇਂ ਮਰਨ ਤੇ ਚਾਰ ਚਾਰ ਮਨਨ ਤੇ ਛੇ ਮੂਹੇ ਚਾਰ ਪੁਰਖ ਸੁੱਤੇ ਪੈ ਗਏ ਇਹੋ ਨਾਲ ਲਾ ਕੇ ਪੰਜ ਗਈ ਜਾਂਦੇ ਨੇ ਇਹਨਾਂ ਨੇ ਤਾਂ ਗੁਰਮਤਿ ਜਾਣ ਬੁੱਝ ਕੇ ਤਲਾਝਲੀ ਦਿੱਤੀ ਹੋਈ ਆ ਖੰਡਰਸ਼ਨ ਤੋਂ ਪਰਬ ਸਾਜ ਇਹ ਜਿਹੜਾ ਸਰੀਰ ਸਾਜਿਆ ਖੰਡਰਸ਼ਨ ਦੇ ਵਿੱਚ ਪੰਜ ਗਿਆਨ ਅੰਦਰ ਨੇ ਛੇ ਦੇ ਘਰ ਚੇ ਗੁਰੇ 체 ਉਹ ਤੇ 체 ਉਹ ਕਿਹੜਾ ਗੁਰ ਗੁਰੇ ਕੋ ਉਹਦਾ ਕੋਈ ਅੰਦਰ ਚੇਤਨਤਾ ਜਾਂ ਗਿਆਨੰਦ ਰਾਇ ਜੇ ਕੋਈ ਬੁੱਧੀ ਫਿਰਦੀ ਹੈ ਬ੍ਰੇਨ ਛੇ ਵਿੱਚ ਬ੍ਰੇਨ ਵਿੱਚ ਕੋਈ ਇਹ ਕੰਮ ਕਰਦੀ ਜਾਂ ਸ਼ਬਦ ਵਿਚਾਰ ਕਰਦੇ ਹਾਂ ਕੋਈ ਚੀਜ਼ ਵਿਚਾਰ ਕਰਦੇ ਹਾਂ ਜਾਂ ਕਿਸੇ ਆਦਮੀ ਨੂੰ ਦੇਖ ਕੇ ਵਿਚਾਰ ਕਰਦੇ ਹਾਂ ਉਹਦਾ ਚਿਹਰਾ ਰੀਡ ਕਰਕੇ ਵਿਚਾਰ ਕਰਦੇ ਹਾਂ ਵਿਚਾਰ ਕਰਨੀ ਹੋਰ ਗੱਲ ਹੈ ਪੜ ਕੇ ਵਿਚਾਰ ਕਰਦੇ ਹਾਂ ਪੜਨਾ ਹੋਰ ਗੱਲ ਹੈ ਖਾਣਾ ਪੜਨਾ ਵਿਚਾਰ ਕਰਨਾ ਹੋਰ ਗੱਲ ਹੈ ਪੜਦਾ ਉਹ ਵੀ ਲਊ ਜੇ ਤੀ ਸਮਝ ਨਹੀਂ ਆਈ ਗੱਲ ਪੜ ਨਹੀਂ ਸਮਝ ਨਹੀਂ ਆਈ ਸਮਝ ਨਾਲਾ ਘਰ ਹੋਰ ਹੈ ਪੜਨ ਵਾਲਾ ਜਿਹੜਾ ਲਾਗੇ ਵਾਰ ਅਸੀਂ ਪੜਨ ਤੱਕ ਮ ਹੈ ਸਮਝ ਔਰ ਬੂਝ ਤਾਂ ਬਹੁਤ ਦੂਰ ਹੈ ਪੜ-ਪੜ ਗੱਡੀ ਲੱਦੀ ਹਾਂਜੀ ਹਨहद ਸ਼ਬਦ ਨਿਰਾਲਾ ਇਨਾ ਤੋਂ ਵੀ ਅਲੱਗ ਹੈ ਖੜ ਉਹ ਹਿਰਦੇ ਵਿੱਚ ਨਾ ਮਰੇਂ ਦੇ ਵਿੱਚ ਨਾ ਦਾ ਨਾ ਦਾ ਉਹ ਬਰੇਂ ਦਿਮਾਗ ਦੇ ਨੇ ਉਥੇ ਨਹੀਂ ਹੈ ਕਹਿੰਦੇ ਉਹ ਇਹ ਸਹੀ ਅਲੱਗ ਇਥੇ ਪੈਦਾ ਨਹੀਂ ਹੁੰਦਾ ਪੰਜ ਗਿਆਨ ਅੰਦਰ ਨਾਲ ਦਿਮਾਗ ਨਾਲੋਂ ਦਾ ਸੰਬੰਧ ਕੋਈ ਨਹੀਂ ਹਾਂਜੀ ਜੇ ਪ੍ਰਭ ਭਾਵ ਹੈ ਤਾਂ ਮਹਿਲੀ ਬੁਲਾਵਾ ਸ਼ਬਦੇ ਜੇ ਜੀਵ ਗੱਲ ਭਾਜਵੇ ਅੰਤਰਾਤਮਾ ਜੇ ਕੀ ਲੱਗ ਜਵੇ ਉਹਦੇ ਵਿਸ਼ਵਾਸ ਕਰ ਲਵੇ ਤਾਂ ਇਹਨੂੰ ਇੱਜ਼ਤ ਮਿਲ ਜਾਂਦੀ ਹੈ ਦਰਗਾਹ 'ਚ ਫਿਰ ਤਾਂ ਪਤ ਪਾਵਰ ਤਾਂ ਅਗੇ ਪਤ ਪਾਵਨ ਦਾ ਤਾਂ ਇੱਕੇ ਤੁਰਦੀ ਹੈ ਬੁੱਢੀ ਜੀ ਦੀ ਜੇ ਬਿਲਕੁਲ ਢੇਲ ਆਣੀ ਖੜੀ ਹੁੰਦੀ ਹੈ ਵੱਦੀ ਨਹੀਂ ਮੂੜ ਨੂੰ ਟੁੱਪੀ ਹੁੰਦੀ ਹੈ ਫਿਰ ਹਰੀ ਹੁੰਦੀ ਹੈ ਮੂੜ ਨਾਲ ਜੁੜ ਕੇ ਜਲ ਵਿੱਚ ਸਾਖ ਕੁ ਮਿਲਾਵਤੀ। ਕੋਈ ਆਈਆ ਜਲ ਨਹੀਂ ਨਵੇਂ ਪੱਤੇ ਜਦ ਆਉਣਗੇ ਆਰਾਮ ਉਦਕ ਮਿਲੂਗਾ ਜਦ ਇਹਨੂੰ ਅੰਮ੍ਰਿਤ ਗਿਆਨ ਮਿਲੂਗਾ ਫਿਰ ਨਵੇਂ ਪੱਤੇ ਫੁੱਟਣਗੇ ਫਿਰ ਡਾਲ ਅੱਗੇ ਚੱਲੂਗੀ ਫਿਰ ਫੁੱਲ ਵੀ ਲੱਗੂ ਫਲ ਵੀ ਲੱਗੂ ਜੇ ਪ੍ਰਭ ਮਹਿਲ ਹੀ ਬੁਲਾਵੇ। ਫਿਰ ਮਹਿਲ ਚ ਬੁਲਾਉਂਦਾ ਫਿਰ ਰਜ ਚ ਆਉਂਦੀ ਹੈ ਤਾ ਇਹਨੂੰ ਸੱਚ ਚੰਗਾ ਲੱਗੂ ਤਾਂ ਹੀ ਸੱਚ ਨੂੰ ਸੁਰੂ ਜਾ ਕੇ ਤਾਂ ਹੀ ਹੱਥ ਕੋ ਜਾਊ ਮਹਿਲ ਬੁਲਾਦਾ ਉਹ ਤਾਂ ਬੁਲਾਉਂਦਾ ਫਿਰ ਕਹਿੰਦਾ ਗੋਲ ਜਾਣੇ ਵਾਲੇ ਨਹੀਂ ਜਾਂਦਾ ਛਬਦੇ ਭੇਦੇ ਛਬਦੇ ਭੇਦੇ ਤੋਂ ਕੀ ਭਾਵਾਂਦਾ ਜੀ ਕਬੀਰ ਸਤਗੁਰ ਸੂਰਮੇ ਬਾਣ ਜੋ ਸ਼ਬਦ ਬਾਣੀ ਦਾ ਬਾਣ ਐਸਾ ਮਾਰਦਾ ਮਿਲ ਗਿਆ ਪੜਾ ਜੇ ਛੇਕ ਉਪੇ ਦੰਦਾਇ ਪਰਮ ਨੂੰ ਜਿਹੜਾ ਹੈਗਾ ਉਹ ਦੂਰ ਕਰ ਦਿੰਦਾ ਪਰਮ ਦਾ ਦੂਰ ਕਰਕੇ ਆਪਣੇ ਨਾਲੇ ਬੁਲਾਉਂਦਾ ਸੋਪਤ ਪਾਵੈ ਫਿਰ ਇੱਜ਼ਤ ਮਿਲਦੀ ਹੈ ਦਰਗਾਹ ਚ ਫਿਰ ਕਾ ਇੱਜ਼ਤ ਮਿਲਦੀ ਹੈ ਕਰ ਵੇਸ ਖਪੈ ਜਲ ਜਾਵੈ ਸੱਚ ਸਾਚੀ ਬਣਾਈ ਜਾਂਦੇ ਨੇ ਰੋਜ਼ ਕਦੇ ਕੋਈ ਤਾਂ ਗੱਲ ਲਿਆ ਕਦੇ ਕੋਈ ਜਿਵੇਂ ਜੰਮਣ ਵਾਲਣ ਚ ਜਗਣ ਬੰਦ ਤੇ ਇਸੇ ਬੰਦਦੇ ਨੇ ਰੋਜ਼ ਇਹ ਵਖਾ ਵੀ ਜਾਂਦੇ ਨੇ ਕਰ ਕਰ ਵੇਸ ਖਪੈ ਜਲ ਜਾਵੇਂ ਆਪਾਂ ਬਸ ਅਖੀਰ ਤੱਕ ਹੀ ਹੈ ਜਲਣਾ ਹੀ ਹੈ ਤ੍ਰਿਸ਼ਾਂ ਦੇ ਵਿੱਚ ਵੀ ਜਲਦੇ ਹੀ ਨੇ ਸਰੀਰ ਉਹ ਤਾਂ ਸਰੀਰ ਮੰਨਦੇ ਨੇ ਤਾਂ ਜਲਦੇ ਨੇ ਨਾ ਬਗੁਦੀ ਚਾਲੀ ਜਾਂਦੀ ਹੈ ਇਹ ਵੀ ਗੱਲ ਹੈ ਸਭ ਬਗੁਦੀ ਚਾਲੀ ਕਰਹਾ ਗਿਆਨ ਤਤ ਗਿਆਨ ਤੋਂ ਬਗੈਰ ਜੋ ਕੁਛ ਇਹਨਾਂ ਨੇ ਅੰਡ ਮੰਡ ਇਕੱਠਾ ਕੀਤਾ ਉਹਨਾਂ ਸਭ ਜਾਲ ਜੰਮਦੇ ਬੱਚੇ ਕੋਲ ਨਿਰਮਲ ਬੁੱਧ ਫੇਰ ਹੁੰਦੀ ਹੈ ਕਾਹੀ ਦੁਬਾਰਾ ਜਨਮ ਚ ਨਿਰਮਲ ਨਿਰਮਲ ਬੁੱਧ ਆ ਜਾਂਦੀ ਹੈ ਜਿਹੜੇ ਸੱਚੇ ਹੋਏ ਨੇ ਅੰਤਰਾਤਮਾ ਕੇ ਸੱਚੇ ਹੋਏ ਨੇ ਅੰਤਰਾਤਮਾ ਦੇ ਸੱਚੇ ਕੀਤੇ ਹੋਏ ਸੱਚੇ ਬਣੇ ਨੇ ਉਹ ਬਿਲਕੁਲ ਸੱਚੀ ਮੁੱੱਚੀ ਸਮਾ ਜਾਂਦੇ ਨੇ ਉਹਨਾਂ ਦਾ ਸੁਭਾਉ ਤਾਂ ਹੈ ਸੱਚ ਉਹ ਤਾਂ ਵਾਕਿਆ ਹੀ ਸਮਾ ਜਾਂਦੇ ਨੇ ਸਾਚੀ ਦਾ ਮਤਲਬ ਸੱਚੀ ਜੀ ਸਮਾ ਨੇ ਬਾਕੀ ਸਭ ਗੱਲਾਂ ਨੇ ਬਾਕੀ ਸਭ ਆਨੰਦ ਰੰਗ ਸਭ ਕੋ ਕਹਿ ਆਨੰਦ ਭਰ ਕੇ ਜਾਣੇ ਬਾਕੀ ਸਭ ਗੱਲਾਂ ਇਹ ਨੇ ਠੀਕ ਹੈ ਜੀ ਇੱਥੇ ਅੱਠਵੀਂ ਪੌੜੀ ਸਮਾਪਤ ਕਰਦੇ ਹਾਂ ਸਤ ਸੰਤੋਖ ਜਰੀਰ ਚਾਂਤ ਸਮੁੰਦ ਭਰੇ ਨਿਰਮਲ ਨੀਰ ਸਤਵੇਂ ਉਹ ਇਹ ਗੱਲ ਸੱਤਵੀਂ ਉਹ ਪੌੜੀ ਕਹੇ ਨਵੀਂ ਜੁਰੂ ਹੋਗੀ ਤੇ ਦੋ ਪੌੜੀਆਂ ਆ ਗਈਆਂ ਪਿੱਛੇ ਸਤ ਸੰਤੋਖ ਹੈ ਉਹ ਉਹ ਦੇ ਹੁੰਦੇ ਨੇ ਅਸੰਤੋਖ ਹੈ ਜਿੱਤੇ ਉਹ ਸਰੀਰ ਅਲੱਗ ਹੈ ਉਹ ਪੂਰਾ ਸਰੀਰ ਸਤ ਸੰਤੋਖੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਸਤੈ ਸਮੁੰਦਰ ਜਿਹੜੇ ਨੇ ਨਿਰਮਲ ਨੀਰ ਦੇ ਭਰੇ ਹੁੰਦੇ ਨੇ ਜਿਹਨੇ ਇਹਨਾਂ ਦੇ ਸੱਤ ਪਤਾਲ ਸੱਤਾ ਕਾਸ ਮੰਨੇ ਹੋਏ ਨੇ ਨਾ ਕਾਸ਼ਵੇਤਾ ਸੁੰਦਰ ਸੁੰਦਰ ਹੁੰਦਾ ਨਹੀਂ ਜੇ ਸੱਤ ਪਤਾਲ ਮੰਨੇ ਨੇ ਸੱਤੇ ਸੁੰਦਰ ਹੋਣਗੇ ਫਿਰ ਹਾਂਜੀ ਕਹਿੰਦੇ ਸਾਰੇ ਨਿਰਮਲ ਗਿਆਨ ਦੇ ਧਰ ਜਾਂਦੇ ਨੇ ਜਿਹੜਾ ਸੱਤ ਸੰਤੋਖ ਹੈ ਪੰਜਾਬੀ ਸੈਵਨ ਨੂੰ ਕਹਿੰਦੇ ਸੱਤ ਤੇ ਸੱਤੇ ਨੂੰ ਔਂਕੜ ਇੱਕ ਵਜਨ ਜਿੱਥੇ ਸੈਵਨ ਲਿਖਣਾ ਹੈ ਸੱਤ ਲਿਖਣਾ ਹੈ ਉਥੇ ਸੱਤ ਲਿਖਿਆ ਹੋਇਆ ਆਹ ਇੱਕ ਗੁਰਬਾਣੀ ਸਾਹਿਬ ਜੇ ਸਤ ਬੋਲੀ ਹੈ ਜੀ ਦਾ ਹੈਗਾ ਹੈ ਸਤ ਸਮੁੰਦਰ ਦਾ ਸਤ ਸਮੁੰਦਰ ਆ ਸਾਤ ਲਿਖਿਆ ਤਾਂ ਭਈ ਅੱਡਾ ਵੱਡੇ ਸਤ ਉੱਤੇ ਇੱਕ ਬਚਨ ਆ ਸਾਤ ਬਹੁ ਬਚਨ ਇਹਦਾ ਭਾਵ ਵੀ ਮੂਲ ਰੂਪ ਜਿਹੜੀ ਭਾਸ਼ਾ ਉਹ ਹਿੰਦੀ ਹੈ ਗੁਰਬਾਣੀ ਕਬੀਰ ਦੀ ਪਹਿਲਾਂ ਬਾਣੀ ਹਿੰਦੀ ਹੈ ਜੀਦੇ ਸਾਰਾ ਟਰਕਟਰ ਗੁਰੂਗ੍ਰਾਮ ਸਾਹਿਬ ਦਾ ਮੱਜਨ ਸੀਲ ਸੱਚ ਰਿਦੇ ਵਿਚਾਰ ਗੁਰ ਕੈ ਸ਼ਬਦ ਦਾ ਮੁੰਜਨ ਆਕਾਸ਼ ਮਿਆਨੇ ਲਹੰਗਦਰਿਆ ਕੁਸ ਗੁਸਲ ਕਰ ਦਮਬੂਦ ਹਾਂਜੀ ਤੇ ਕਹਿੰਦੇ ਐ ਇਹਦੇ ਚ ਅੰਦਰ ਇੱਥੇ ਜੇ ਮਲਕੇ ਨਾਵੇ ਮਨ ਸੱਚ ਰਿਦਾ ਵਿਚਾਰ ਇਹ ਹੈ ਜਾਂ ਸੱਚ ਨੂੰ ਹਿਲਦੇ ਵਿਚਾਰ ਕਰਦੇ ਆ ਉਹ ਹੀ ਜਿਉਂ-ਜਿਉਂ ਵਿਚਾਰੂਗਾ ਜੇ ਮੈਂ ਹੱਥਾਂ ਨੂੰ ਦੋਹਾਂ ਨੂੰ ਮਲ ਕੇ ਧੋਈਦਾ ਜੇ ਖੱਤ ਨੂੰ ਮੈਲ ਹੋਵੇ ਤਾਂ ਦੋਵੇਂ ਸਾਬਣ ਲਾ ਕੇ ਦੋ ਹੱਥ ਲੱਗਣਾ ਪੈਂਦਾ ਜੇ ਸਾਬੂਨ ਲਈਏ ਤੋਏ ਹਾਂ ਜੜੀਏ ਮੱਤ ਪਾਕਿਸਤਾਨੋ ਤੋਏ ਨਾਮਾ ਰੰਗ ਚਾਹੇ ਨਾਮ ਦਾ ਹੀ ਸਾਬਣ ਵਿਚਾਰਨਾ ਮੜਨਾ ਹੀ ਨਾਲ ਚਿੱਤ ਨੂੰ ਲੱਗਣਾ ਪੈਂਦਾ ਉਹ ਨਿਰਮਲ ਹੈ ਨਾ ਉਹ ਉੱਪਰ ਕਾਹਨ ਆਇਆ ਨਾ ਸੱਚ ਹੈ ਸੱਚੇ ਤੋਂ ਜਿਹੜਾ ਨਿਰਮਲ ਹੈ ਉਹ ਉਹਦੀ ਮਦਦ ਨਾਲ ਹੀ ਨਿਰਮਲ ਹੋਵੇ ਤਾਂ ਗੱਲ ਬਣਦੀ ਹੈ ਮਨੁੱਖ ਦੀ ਮਦਦ ਨਾਲ ਜਿਹੜਾ ਸੱਚਾ ਆਪਣੇ ਆਪ ਨੂੰ ਮੰਨੀ ਬੈਠਿਆ ਉਹ ਗਲਤ ਹੈ ਕੋਈ ਨਹੀਂ ਹੋ ਸਕਦਾ ਆਦਮੀ ਦੀ ਮਦਦ ਨਾਲ ਨਹੀਂ ਸੱਚਾ ਹੋ ਸਕਦਾ ਬਾਹਰ چاہے ਸੱਚਾ ਸਹੀਰਾ ਵੀ ਹੋਵੇ ਜਿੰਨਾ ਚਿਰ ਉਹਦਾ ਆਪਣਾ ਚੇਤਨ ਕਰਮ ਨਹੀਂ ਇਕੱਠੇ ਹੋ ਕੇ ਉਦਮ ਕਰਦੇ ਉਹਦਾ ਕਹਿੰਦੀ ਸੱਚਾ ਹੋ ਸਕਦਾ ਤੇ ਵਿਚਾਰ ਨੂੰ ਇਹੀ ਮਲਣਾ ਚਾਹਨੇ ਆ ਕਿ ਜੇ ਮਲ ਮਲਣਾ ਹੋਣਾ ਵਿਚਾਰ ਹੋ ਗਈ ਵਿਚਾਰ ਵਾਸਤੇ ਦੋ ਚਾਹੀਦੀਆਂ ਚੀਜ਼ਾਂ ਵਿਚਾਰ ਨੂੰ ਦੋ ਚਾਹੀਦੇ ਨੇ ਇਕੱਲਾ ਤਾਂ ਵਿਚਾਰ ਸਕਦਾ ਹੀ ਨਹੀਂ ਇਕੱਲਾ ਸਕਦਾ ਠੀਕ ਹੈ ਜੀ ਵਿਚਾਰ ਸਕਦਾ ਵਿਚਾਰ ਨੂੰ ਦੋ ਚਾਹੀਦੇ ਤੇ ਉੱਥੋਂ ਹੀ ਇਹਦਾ ਭਾਵ ਹੈ ਵੀ ਸੋਚੇ ਸੋਚਣਾ ਹੋਵੇ ਤਾਂ ਦੱਸਦਾ ਕਿ ਅੰਦਰ ਦਾਲ ਹੋਈ ਹੋਈ ਹੈ ਤੇ ਜਦੋਂ ਕਹਿੰਦੇ ਆ ਅੰਤਰਗੱਤ ਤੀਰਥ ਮਲਣਾ ਆਓ ਤੇ ਉਹ ਸ਼ਬਦ ਦੀ ਜੋ ਮਨਅਰਚਿਤ ਦੇ ਬਿਲਕੁਲ ਬਿਲਕੁਲ ਤੇ ਔਰ ਚੇਤਨ ਨਾਲ ਹੋਊਗੀ ਇਹਦੇ ਨਾਲ ਵਿਚਾਰ ਤਾਂ ਬੁੱਧੀ ਕਰਦੀ ਹੈ ਕੋਈ ਗੱਲ ਹੈ ਬੁੱਧੀ ਔਰ ਚਿਤ ਕਿਤੇ ਦੋ ਨੇ ਹਾਂਜੀ ਗੁਰ ਕਾ ਸ਼ਬਦ ਪਾਵੈ ਸਭ ਪਾਰ ਗੁਰ ਸ਼ਬਦ ਪਾਵੈ ਸਭ ਉਪਦੇਸ਼ ਹੈ ਇਹਦੇ ਨਾਲੇ ਸਮਝ ਆਉਂਦੀ ਹੈ ਇਹਦੇ ਨਾਲੇ ਪਾਰ ਹੁੰਦਾ ਹੈ ਇਹਦੇ ਨਾਲੇ ਮਾਇਆ ਲੈਂਦੀ ਹੈ ਪਰਮਤੋ ਪਾਰ ਇਹਦੇ ਨਾਲੇ ਗੁਰ ਕੇ ਉਦੇਸ਼ ਨਾਲੇ ਹੁੰਦਾ ਹੈ ਗੁਰ ਕੇ ਉਦੇਸ਼ ਨੂੰ ਵਿਚਾਰੇ ਤੇ ਹੀ ਹੁੰਦਾ ਹੈ ਮੁਕਤ ਸੱਚੋਂ ਭਾਏ ਸੱਚ ਨਿਸ਼ਾਨਾ ਠਾਕ ਨਾ ਪਾਇ ਦੇਖੋ ਮਨ ਸਾਚਾ ਮੁਕਤ ਸੱਚੋਂ ਭਾਏ ਇਹ ਕਹਿੰਦਾ ਜੋਨੇ ਜਾਂ ਪੰਜ ਪਾਜਾਂ ਨੇ ਮਨ ਸਾਚਾ ਮੁਖ ਸਾਚਾ ਸੋਏ ਇਸੇ ਗੱਲ ਨੂੰ ਉੱਥੇ ਕਹਤਾ ਜੇ ਬੰਨ ਵਿੱਚ ਸਾਚਾ ਹੈ ਫਿਰ ਮੂੰਹ ਤੋਂ ਸੱਚ ਦੀ ਗੱਲ ਕੀਤੀ ਜਾ ਸਕਦੀ ਹੈ ਫਿਰ ਮੂੰਹ ਦੇ ਵਿੱਚੋਂ ਸੱਚ ਆਉਂਦਾ ਬੋਲਦਾ ਦੂਜਿਆਂ ਨੂੰ ਪਾਉਂਦਾ ਵੀ ਹਾਂ ਸੱਚ ਹੈ ਨਾਲੇ ਜਰ ਬੰਦੇ ਦੇ ਸਾਚੀ ਨਹੀਂ ਹੈ ਉਹਨਾਂ ਜਰ ਉਹ ਕਹੀ ਜਾਵੇ ਮੈਂ ਸੱਚ ਬੋਲਦਾ ਪਰ ਸਾਰਿਆਂ ਦੇ ਬੰਨ ਨੂੰ ਪਸੰਦ ਨਹੀਂ ਦੂਜਿਆਂ ਨੂੰ ਪਾਉਂਦਾ ਉਹਦਾ ਸੱਚ ਗੁਰਬਾਣੀ ਦੂਜਿਆਂ ਨੂੰ ਤਾਂ ਪਾਉਂਦੀ ਹੈ ਇਹਨਾਂ ਨੇ ਬੋਲੀ ਉਹਨਾਂ ਦੇ ਮਨ ਦੇ ਵਿੱਚ ਸੱਚ ਉਹਨਾਂ ਦੇ ਅੰਦਰ ਸੱਚ ਪ੍ਰਗਟ ਥੀ ਹਾਂਜੀ ਠੀਕ ਹੈ ਜੀ ਸੱਚ ਨਿਸ਼ਾਨੇ ਠਾਕ ਨਾ ਪਾਏ ਆਹ ਹੁੰਦਾ ਟੌਂਸਾ ਜਿਵੇਂ ਗੌਗਨ ਦਮੋਬੋ ਬਾ ਜਾਂ ਯੂਰੋਪਾ ਕਹਿੰਦੇ ਸੱਚ ਦਾ ਜਿਹੜਾ ਸ਼ਬਦ ਉਹਨੂੰ ਕੋਈ ਚੀਜ਼ ਨਹੀਂ ਰੋਕ ਸਕਦੀ ਉਹਦੇ ਮੂਰੇ ਕੋਈ ਡਾਲ ਨਹੀਂ ਕੋਈ ਦੁਨੀਆ ਦੀ ਡਾਲ ਨਹੀਂ ਹੈ ਉਹਦੇ ਮੂਰੇ ਹਾਂ ਮਨ ਇਹ ਪਾਸੇ ਹੋ ਜਾਂਦਾ ਐਸੀ ਤਲਵਾਰ ਐਸਾ ਤੀਰ ਐ ਐਸਾ ਗਿਆਨ ਦਾ ਗੋੜਾ ਐ ਉਹ ਰੋਗ ਨਹੀਂ ਉਹਨੂੰ ਕੋਈ ਠਾਕਦਾ ਹਾ ਉਹਦੀ ਕਾਟੀਆਂ ਕੋਈ ਕਾਟ ਉਹਦੀ ਕੋਈ ਨਹੀਂ ਹੈ ਸੱਚ ਦੀ ਸਾਛਬਤ ਦੀ ਹਾਂ ਉਹ ਤਾਂ ਪਾਸੇ ਆ ਜਾਂਦਾ ਬਸ ਲੱਗਣ ਨਹੀਂ ਦਿੰਦਾ ਮੰਨਣ ਤੋਂ ਅਕਾਰਿ ਹੋ ਜਾਂਦਾ ਠੀਕ ਹੈ ਜੀ ਇੱਥੇ ਨੌਵੀਂ ਸਮਾਪਤੀ